ਸੇ ਲੋਕ ਤੀਜਾ ਵਾਹ ਆਪ ਖਾਇਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾ ਸਿਫਤ ਸਲਾਹ ਹੈ ਗੁਰਮੁਖੀ ਬੁੱਝੇ ਕੋਈ ਵਾਹ ਵਾ ਆਪ ਖਾਇਦਾ ਜਿਹੜੇ ਵਾਹ ਵਾ ਹੈ ਨਾ ਗੁਰਬਾਣੀ ਹੈ ਹਾਂਜੀ ਇਹਦੀ ਵਾਹ ਵਾ ਵਡਿਆਈ ਹੈ ਪਰਮੇਸ਼ਰ ਦੀ ਕਿ ਆਪ ਹੈ ਆਖਉਂਦਾ ਉਹ ਉਹ ਬਣਾ ਆ ਕਰਨ ਵਾਲਾ ਤਾਂ ਬੁਲਾਇਆ ਬੋਲਦਾ ਹੈ ਵਾ ਵਾ ਵਾ ਬੋ ਖਾਣੇ ਦਾ ਠੀਕ ਹੈ ਜੀ ਕੋਈ ਸ਼ਬਦੀ ਸੱਚ ਸੋਈ ਆ ਗੁਰਪਦੇਸ ਸੱਚ ਹੈ ਉਹ ਪ੍ਰਵੇਸ਼ਰ ਇਹ ਬਲਾਵੇ ਤਾਂ ਬੋਲ ਸਕਦਾ ਹੈ ਬੋਲ ਸਕਦਾ ਕੋਈ ਇਹ ਪ੍ਰਵੇਸ਼ਰ ਦਾ ਬਲਾਇਆ ਹੀ ਬੋਲ ਸਕਦਾ ਇਹ ਬਾੜੀ ਜਿਹੜੀ ਹੈ ਹਾਂ ਜੀ ਇਹ ਉਹਦੀ ਹੋਏ ਗਾਨ ਕਾਵਨ ਕੋਈ ਕੋੜ ਤਾਂ ਕੋਈ ਜਾਣਦਾ ਹੀ ਨਹੀਂ ਹਾਂਜੀ ਵਾਹ ਵਾ ਕਹਿਣ ਦਾ ਭਾਵ ਇਹ ਨਹੀਂ ਵੀ ਮੂੰਹੋਂ ਵਾਹ ਵਾ ਕਹਿਣਾ ਵਾਹ ਵਾ ਗੁਰਬਾਣੀ ਵਾਸਤੇ ਕਿਹਾ ਹੈ ਜੀ ਵਾਹ ਵਾ ਹੁੰਦਾ ਵਧਾਈ ਕਰਨ ਹੱਥਾ ਗੁਰਬਾਣੀ ਦੇ ਥਰੂ ਕਰਨੇ ਕਿ ਕੱਲਾ ਮੂੰਹ ਤਹਾ ਆਪ ਦਾ ਭਗਤੀ ਆਈ ਹੋਈ ਹੈ ਸਾਰੀ ਬਾਣੀ ਵਾਹ ਵਾਹ ਹੈ ਠੀਕ ਹੈ ਜੀ ਹਾਂ ਜੀ ਵਾਹ ਵਾਹ ਸਿਫਤ ਸਲਾਹ ਕੋਈ ਹੱਸਦਾ ਉਹ ਆਗੇ ਆਗੀ ਡੈਫੀਨਿਸ਼ਨ ਆਗੀ ਵਾਹ ਵਾਹ ਕੀ ਹੈ ਸਿਫਤ ਸਲਾਹ ਹੈ ਜਿਹੜੀ ਸਿਫਤ ਸਲਾਹ ਗੁਰਬਾਣੀ ਦੀ ਹੈ ਹੈ ਗੁਰੂ ਕੀ ਕੋਈ ਕੋਈ ਗੁਰਮੁਖ ਭੂਜੇ ਵਾਹ ਵਾਣੀ ਸੱਚ ਹੈ ਸੱਚ ਮਿਲਾਵਾ ਹੋਈ ਸੱਚੀ ਬਾਣੀ ਸਾਰੀ ਵਾਹ ਵਾਹ ਸਿਫਸਲਾਏ सच ਮਿਲਾਵਾ ਹੋਏ ਸਾਚੇ ਰੂਪੇ ਦਿੱਗੇ ਨਾਨਕ ਵਾਹ ਵਾਹ ਕਰਤੇ ਪ੍ਰਭ ਪਾਇਆ ਕਰਮ ਪ੍ਰਾਪਤ ਹੋ ਗਏ हो, ਵਾਹ ਵਾਹ ਕਰਤੇ ਪ੍ਰਭ ਪਾਇਆ ਕਰਮੀ ਪ੍ਰਾਪਤ ਹੋ ਗਏ ਕਰਮ ਰਾਪਤੀ ਹੀ ਉਹਦੀ ਕਿਰਪਾ ਇੱਥੇ ਪ੍ਰਭ ਪਾਇਆ ਲਿਖਿਆ ਜੀ ਆਪਣਾ ਪ੍ਰਭੇ ਪਾਇਆ ਪਹਿਲਾਂ ਤਾਂ ਆਪਣਾ ਪ੍ਰਭੇ ਉਹ ਜਿਹੜੀ ਗੁਰਬਾਨੀ ਹੈ ਨਾ ਵਾ ਇਹਦੇ ਨਾਲ ਤਾਂ ਇਹਦੇ ਦੋ ਤੇ ਇੱਕੇ ਹੁੰਦੇ ਤਾਂ ਉਹ ਆਉਤੂ ਈ ਬانيه ਲੱਗਾਇ ਉਹਦੇ ਇਹਦੇ ਇਹਦੇ ਨਾਲ ਇੱਕ ਹਉ ਮਹੱਲਾ ਤੀਜਾ ਵਾ ਕਰਤੀ ਰਸਨਾ ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਜਿਹੜੀ ਆਤਮਾ ਨੇ ਵਾ ਕੀਤਾ ਫਸ ਸ਼ਬਦ ਸੀ ਸ਼ਬਦ ਨੇ ਸੁਹਾਈ ਨੇ ਸਭ ਬਾਰੀ ਨੂੰ ਹਜ਼ਾਰ ਬਾਰ ਪੜ ਲੀਏ ਬੰਦੀ ਹੱਕ ਦਾ ਨਾ ਠੱਕਦਾ ਇਹ ਤਾਂ ਠੱਗ ਦਾ ਹੱਕ ਨਾ ਖਦਾ ਜਿਹਨੂੰ ਸਮਝਦੀ ਸਮਝ ਨਹੀਂ ਉਹਦਾ ਮਨ ਨੀ ਵੀ ਨਾ ਹੱਕਦਾ ਇਹਨੂੰ ਠੱਕਦਾ ਠੱਕਦਾ ਦਾ ਤਾਨੀ ਕੇ ਆਪਨਾਂ ਦੀ ਆਤਮਾ ਨੇ ਠੱਕਣਾ ਆਤਮਾ ਨੂੰ ਸ਼ਕਤੀ ਮਿਲ ਗਈ 11 ਤਾਨੀ ਰੱਖਦਾ ਇਹਦਾ ਜਿੱਦੀ ਵਾਰ ਪੜੂਗੋ ਨੀ ਵਾਰੋ ਮੇ ਤਨ ਮਹਾਰਾਜ ਨੂੰ ਲੋ ਵਿੱਚ ਤਰੋਂ ਗਿਆਨ ਵੱਧਾ ਚਲਾ ਚਲਾ ਜਾਊਗਾ ਉਹਦਾ। ਔਰ ਜਿਹੜੇ ਅੱਕ ਦੇ ਥੱਕਦੇ ਨੇ ਉਹ ਤਾਂ ਨੇ। ਰੌਣ ਲਾਉਂਦੇ ਨੇ ਤਾਂ ਥੱਕਦੇ ਅੱਕਦੇ ਨੇ। ਗੁਰਦੁਆਰੇ ਗ੍ਰੰਥੀ ਪੜਾਂ ਕਰਦੇ ਨੇ ਡਿਊਟੀ ਕਰਨੀ ਪੈਂਦੀ ਹੈ ਤਾਂ ਥੱਕਦੇ ਥੱਕਦੇ ਨੇ। ਉਹ ਤਾਂ ਵੱਧਾ ਜੱਤੀ ਨੇ। ਬੰਨੜ ਜਨੇ ਤਨਹਾ ਮਿਲਦੀ ਹੈ ਕੰਮ ਕਰਦੇ ਨੇ ਉਹ ਕਰਦੇ ਸਕਦੇ ਨਹੀਂ ਹਾਂਜੀ ਰਸਨਾ ਤੋਂ ਭਾਵ ਬੁੱਧੀ ਹੋਏਗਾ ਨਾ ਜੀ ਵਾਹ ਵਾਹ ਕਰਤੀ ਰਸਨਾ ਸਬਦ ਆਤਮਾ ਗੈਲੋ ਆਤਮਾ ਨੂੰ ਬੁੱਧੀ ਕਿਦੋਂ ਹੋਦੀ ਹੈ ਨੀ ਚੇਤਨ ਦੀ ਗੱਲ ਹੈ ਨਾ ਬੁੱਧੀ ਵੀ ਚੇਤਨਾ ਆ ਤੇ ਹੁੰਦਾ ਠੀਕ ਹੈ ਜੀ ਪੂਰੇ ਸ਼ਬਦੀ ਪ੍ਰਭ ਮਿਲਿਆ ਆਈ ਪੂਰਾ ਸ਼ਬਦ ਜਿਆਦਾ ਹੈ ਜਾਂ ਸਾਰੇ ਸੱਚ ਹੋਵੇ ਜੇ ਸੱਚ ਵੀ ਕਮੀ ਹੋਵੇ ਸ਼ਬਦ ਪੂਰਾ ਨਹੀਂ ਹੁੰਦਾ ਜੇ ਮਿੱਟੀ ਨਹੀਂ ਜਗਾ ਚੰਨਾ ਰੂੜ ਦਾ ਪਾ ਦੇ ਵੀ ਮਿੱਟਾ ਥੋੜਾ ਥੋੜਾ ਜਿਹਾ ਰੂੜ ਪਾ ਲੋ ਫਿਰ ਖਾਰਾ ਬਣ ਜਾਂਦਾ ਪੂਰਾ ਸ਼ਬਦ ਜਿਆਦਾ ਹੈ ਜਾਂ ਸਾਰੇ ਸੱਚ ਹੋਵੇ ਪ્યોਰ ਸੱਚ ਸ਼ਬਦ ਪੂਰੇ ਸ਼ਬਦ ਦੇ ਵਿੱਚੋਂ ਜਦ ਨਿਕਲ ਗਈ ਨਾ ਸਾਜ ਹੋ ਗਿਆ ਠੀਕ ਹੈ 2000 ਜ ਤੱਕ ਹੋ ਆ ਸ਼ਬਦ ਹੈ ਸ਼ਬਦ ਭੇਦ ਹੈ ਸਾਡੀ ਬੋਲੀ ਦਾ ਰੇ ਬੋਲੀ ਦਾ ਫਰਕ ਇਹ ਬੋਲੀ ਦਾ ਫਰਕ ਹੈ ਉਹ ਸ਼ਬਦ ਭੇਦ ਕਹਿੰਦੇ ਜੀ ਬੋਲੀ ਦਾ ਫਰਕ ਬਿਟ ਹੈ ਉਦੋਂ ਗੁਰਬਾਣੀ ਬਿਲਕੁਲ ਸਹੀ ਸਮਝ ਆਉਣ ਲੱਗ ਜਾਂਦੀ ਜੋ ਰਸ ਬਦਲ ਜਾਂਦਾ ਰਸੋਂ ਲੱਗ ਜਾਂਦਾ ਤੋਂ ਬਦਲ ਚਿੱਤ ਬੜੇ ਕਰ ਦੇ ਗੱਲ ਤਾਂ ਲਫ਼ਜ਼ ਕੁਝ ਵੀ ਵਰਤੇ ਨੇ ਹਕੀਕਤ ਇਹ ਸ਼ਬਦ ਪੇਰ ਜਿੰਨਾ ਜਿਹੜਾ ਹੈਗਾ ਉਹਨੂੰ ਜਿਹੜਾ ਅਰਥਾਂ ਦੇ ਅਨਰਥ ਹੋ ਜਾਂਦੇ ਸਹੀ ਸਮਝ ਆਉਂਦੀ ਉਹ ਨਹੀਂ ਸਾਨੂੰ ਸ਼ਬਦ ਪੇਰ ਕਾਕ ਸ਼ਬਦ ਭੇਦ ਜਾਣ ਲਈ ਜਾਣ ਆਈ ਜਿਸਮ ਤੋਂ ਜਾਣਾ ਹੈ ਸੋਈ ਜਦ ਜੁਣੇ ਹਰ ਗੁਣ ਸਦੀ ਅੱਖ ਭਗਾਨ ਇਹਦੇ ਬਾਰੇ ਬਹੁਤ ਕੁਝ ਕਿਹਾ ਹੈ ਸ਼ਬਦ ਭੇਦ ਬਾਰੇ ਇਹਨਾਂ ਕਰਾਮੇ ਕੋਈ ਹੋਈ ਇਹ ਤਾਂ ਕਰਨੇ ਕੁਰਬਾਨੀ ਤਾਂ ਕਰਨੇ ਅਖਰਾਂ ਦੇ ਵਿੱਚੋਂ ਸਮਝਣ ਵਾਲੀ ਗੱਲ ਨਹੀਂ ਗੱਲ ਬੁੱਝਣ ਵਾਲੀ ਹੈ ਕਿਉਂਕਿ ਸ਼ਬਦ ਭੇਦ ਹੈ ਜੋ ਲਿਖਿਆ ਹੋਇਆ ਕਰਨਾ ਹੋਣੀ ਹੈ ਇਹਨੂੰ ਸੁਮੱਦ ਲਿਖਦਾ ਸੁਮੱਦ ਨਹੀਂ ਹੈ ਉਹ ਜਿਹਨੂੰ ਬੰਗਲਾ ਕਹਿੰਦਾ ਤਾਂ ਬੰਗਲਾ ਨਹੀਂ ਹੈ ਉਹ ਇਹ ਹੰਸ ਕਹਿੰਦਾ ਹੰਸ ਨਹੀਂ ਹੈ ਉਹ ਹੰਸ ਟੋਣ ਦੇ ਫਿਰ ਉਥੇ ਬੋਸ ਤੇ ਜਾ ਕੇ ਸ਼ਬਦ ਭੇਜਦਾ ਸ਼ਬਦ ਭੇਜਦਾ ਬੋਲੀ ਸਾਡੀ ਹੈ ਬੋਲੀ ਸਾਡੀ ਹੈ ਭਾਸ਼ਾ ਸਾਡੀ ਹੈ ਗੱਲ ਕੁਝ ਹੋਰ ਹੈ ਗੱਲ ਵਿਰਾਕਾਰ ਦੀ ਹੈ ਵਿਰਾਕਾਰ ਦੇ ਦੇਸ ਦੀ ਹੈ ਬੋਲੀ ਸੰਸਾਰ ਦੀ ਹੈ ਸ਼ਬਦ ਭੇਜਦਾ ਗੱਲ ਦਾ ਨਰਾਕਾਰ ਦੇ ਦੇਸ ਦੀ ਕਰ ਲਈ ਅਸੀਂ ਚੀਜ਼ਾਂ ਸਾਰੀਆਂ ਨਰਾਕਾਰ ਦੇ ਦੇਸ ਦੀਆਂ ਨੇ ਜਿਨ੍ਹਾਂ ਦੀ ਗੱਲ ਕਰ ਜੋ ਸਮਝ ਰਹੇ ਆ ਸਮਝਾ ਰਹੇ ਬੋਲੀ ਸ਼ਬਦ ਹੈ ਹੋਏ ਸ਼ਬਦ ਦੀ ਸਮਝ ਆ ਗਈ ਜਿਹੜਾ ਸ਼ਬਦ ਭੇਦ ਗੁੱਝ ਲਿਆ ਜਾਂਦਾ ਵਾਹ ਮੂੰਹ ਕਢਾਈ ਵਾਹ ਵਾਹ ਕਰੈ ਸਈ ਜਨ ਜਿਨ ਕੋ ਪਰਜਾ ਪੂਜਣ ਆਈ ਬੜਵਾਗਿਆਂ ਦੇ ਮੁਖੋ ਕਢਾਈ ਐ ਬਾਣੀ ਕੁਰਬਾਨੀ ਉਹਨਾਂ ਦੀ ਪਰਮੇਸ਼ਰ ਦੇ ਵੱਡੇ ਬਾਪਿਆਂ ਵਾਲੇ ਸੀ ਉਹ ਜਿਨ੍ਹਾਂ ਦੇ ਮੁਖੋ ਕਢਾਈ ਐ ਮੁਖੋ ਕਢਾਈ ਅੱਜ ਫੇ ਦੁਨੀਆਂ ਨਾਲ ਜੇ ਮੁਖੋ ਕਢਾਈ ਤਾਂ ਜਿਨ੍ਹਾਂ ਸੁਣੀ ਲੋਕਾਂ ਨੇ ਖਲਕਤਨ ਐ ਉਹ ਵੀ ਕੂਝਣ ਆਈ ਪ੍ਰਗਟ ਪਈ ਸਗਲੇ ਜੋਗਦਰ ਗੁਰ ਰਾਜਕ ਕੀ ਕੀ ਵਡਿਆਈ ਕੀ ਕੀ ਜਿਹੜੀ ਕੀਤੀ ਹੋਣਾ ਸਗਲੇ ਵਡਿਆਈ ਪ੍ਰਗਟ ਹੋ ਗਈ ਸਗਲੇ ਜੋਗਦਰ ਆਏ ਫੇਰ ਆਏ ਗੁਨਾਹਗਰ ਉਹਦੇ ਤੇ ਨਾ ਤੋ ਮਣ ਲ ਗਿਆ ਕਿਉਂ ਗਿਆ ਉਹ ਲੈ ਲੋ ਉਹ ਵਡਿਆਈ ਜਿਹੜੀ ਸੁਣੀ ਸੀ ਲੈਣੇ ਨੇ ਤਾਂ ਮਣ ਗਿਆ ਸਰਦਾਰ ਕੋ ਮਿਲਣ ਗਿਆ ਜਿਹੜੀ ਅੱਜ ਬੈਠ ਕੇ ਗੱਲ ਕਹੀ ਸੀ ਉਹ ਸੁਣਨੀ ਸੀ ਤਾਂ ਮਿਲਣ ਗਿਆ ਤੇ ਤੋਲ ਕੇ ਦੇਖੀ ਉਧਰ ਖਰੀ ਸੀ ਜਾਂ ਮੰਤਰਾਂ ਦੀ ਜਿੱਤ ਦੇ ਤੋਲਾ ਸਰਾਬ ਕਮਾਵਾ ਕਾਢੇ ਪੀਤਰ ਉਸ ਤੋਂ ਸਭ ਤੋਲ ਦੀ ਤੋਲ ਕੇ ਦੇਖੀ ਗੱਲ ਖਰੀ ਉਤਰੀ ਫਿਰ ਕਿਹਾ ਵੀ ਚਲੋ ਫਿਰ ਭਜਿਆ ਸਾਰਾ ਜਿਹਨੇ ਮਤਲਬ ਦੀ ਬਾਣੀ ਨੀ ਦੀ ਹੈਗੀ ਗੁਰਬਾਣੀ ਇਹ ਗੋਲਕ ਸਾਰਿਆਂ ਨੇ ਮਤਲਬ ਦੀ ਹੈ ਗੁਰਬਾਣੀ ਨੇ ਸਾਰਿਆਂ ਦੇ ਮਤਲਬ ਦੀ ਗੱਲ ਹਾਂਜੀ ਵਾਹ ਸਾਰਿਆਂ ਦੇ ਵਾਸਤੇ ਗੱਲ ਹੀ ਪਰਜਾ ਤੋਂ ਭਾਵ ਹੁੰਦਾ ਫਿਰ ਸਿੱਖ ਸੇਵਕ ਆਉਂਦੇ ਆ ਪੂਜਣ ਵਾਸਤੇ ਸੁਣਨ ਵਾਸਤੇ ਹਾਂਜੀ ਸੇਵਕ ਕੋਈ ਜ਼ਰੂਰੀ ਹੈ ਪਰਜਾ ਚ ਮੁਸਲਮਾਨ ਵੀ ਹੋ ਸਕਦੇ ਨੇ ਉਹਨੇ ਵੀ ਆਉਂਦੇ ਪਰ ਸਿੱਖ ਦਾ ਮਤਲਬ ਇਹ ਤਾਂ ਨਹੀਂ ਹੈ ਵੀ ਅਸੀਂ ਦੂਏ ਸਿੱਖ ਜਿਹਨੇ ਸਿੱਖਿਆ ਲੈਣੀ ਹੈ ਸਿੱਖ ਹੋਏ ਅਰਜੈ ਕਹੋ ਫਿਰ ਪਰਜਾ ਲਾ ਫਿਰ ਪਰਜਾ ਕੋਈ ਵੀ ਹੋਵੇ ਪਰਜਾ ਸਾਧਵੇਂ ਹੁੰਦੀ ਉਹ ਵੀ ਆਉਂਦੇ ਸੀ ਪਰਜਾ ਦਾ ਧਿਆਨ ਬੱਧੀ ਦਾ ਵਰਤਿਆ ਪਰਜਾ ਲਾ ਅਵਸਥਾ ਦੇ ਵਿੱਚ ਕੋਈ ਧਰਮ ਨਹੀਂ ਹੁੰਦਾ ਆਦਮੀ ਦਾ ਇਹ ਧਰਮ ਨਹੀਂ ਹੈ ਸੱਚ ਹੈ ਇਹ ਜਿਹੜੇ ਦੁਨਿਆਵੀ ਧਰਮਾਂ ਆ ਉਹਾਂ ਦੀ ਭੱਟੀ ਪੋਛਦਾ ਸਾਰੇ ਆਂਦੀ ਉਹਨਾਂ ਕਰਦਾ ਸਾਰੇ ਆਦੂਏ ਧਰਮਾਂ ਆ ਉਹ ਤਾਂ ਬੜੀਆਂ ਵੇਟ ਕਰਦੇ ਆ ਸਾਰੇ ਇਹ ਤਾਂ ਮਗ ਤੇ ਕਾਉ ਦੇ ਜਿਹਾ ਸਾਰੀ ਪਰ ਜਿਹੜਾ ਛੱਡਦਾ ਹੀ ਕਿਸਦਾ ਖਦੀਰ ਠੀਕ ਹੈ ਜੀ ਇਹ ਤਾਂ ਵਗਦਾ ਹੀ ਕਿਸੇ ਨੂੰ ਨਹੀਂ ਜਿੱਦਾਂ ਦੁਨੀਆਂ ਪੋਛਦੀ ਹੈ ਬਾਪੁਰਸ਼ ਕਹਿੰਦੀ ਹੈ ਇਹ ਉਹਨਾਂ ਦੀਆਂ ਜਿਹੜੀਆਂ ਬੜੀਆਂ ਹੋਈਆਂ ਨੇ ਬੜੀਆਂ ਬੜੀਆਂ ਦਸਿੱਤਾਂ ਬੜੀਆਂ ਉਹਨਾਂ ਦੀਆਂ ਕਬਰਾਂ ਇਹ ਬੜੇ ਬੜੇ ਸਮਾਦੀਆਂ ਇਹ ਤੇ ਇੱਕੋ ਹੀ ਲੋਹੇ ਦਾ ਫੇਰੀ ਜਾਂਦਾ ਹੈ ਇਹ ਬੇਨਾਮ ਰਹੇ ਆ ਗੱਲ ਬਦਲਦਾਰ ਹੈ ਹਾਂਜੀ ਹਾਂਜੀ ਵਾਹ ਵਾਹ ਕਰਮੀ ਪ੍ਰਾਪਤ ਹੋਵੇ ਨਾਨਕ ਦਰ ਸੱਚ ਹੈ ਸੁਭ ਵਾਹ ਵਾਹ ਕਰਮ ਪ੍ਰਾਪਤ ਹੋਵੇ ਇਹ ਬੜੇ ਭਾਗਾਂ ਨਾਲ ਪ੍ਰਾਪਤੀ ਹੈ ਜੀ ਗੁਰਬਾਨੀ ਕੋਈ ਬੋਲ ਸਕੇ ਗੁਰਬਾਨੀ ਕੋਈ ਅਰਥਾ ਸਕੇ ਇਹ ਕੋਈ ਛੋਟੀ ਮੋਟੀ ਗੱਲ ਹੈ ਮੋਟੀ ਮੋਟੀ ਗੱਲ ਨਹੀਂ ਹੈ ਉਸ ਵੇਲੇ ਵੀ ਲੋਕਾਂ ਨੇ ਨਹੀਂ ਸਮਝਿਆ ਗੁਰੂਆਂ ਨੂੰ ਉਸ ਵੇਲੇ ਵੀ ਭਗਤਾਂ ਨੂੰ ਲੋਕਾਂ ਨੇ ਨਹੀਂ ਸਮਝਿਆ ਨਹੀਂ ਸਮਝਦੇ ਹੁੰਦੇ ਵਿਰਲੇ ਸਮਝਦੇ ਹੁੰਦੇ ਹਾਂ ਹੋਵੇ ਨਾਨਕ ਦਰ ਸੱਚੇ ਸ਼ੋਭਾ ਪਾਈ ਸੱਚੇ ਦਰ ਤੇ ਉਹਦੀ ਸ਼ੋਭਾ ਹੁੰਦੀ ਹੈ ਸ਼ੋਭਾ ਦੇ ਲਫ਼ਜ਼ ਨਾਲ ਕਿਹਨੂੰ ਅੱਛਾ ਜੀ ਸ਼ੋਭਾ ਹਿੰਦੀ ਦਾ ਲਫ਼ਜ਼ ਹੈ ਸ਼ੋਭਾ ਹੈ ਸਾਡੇ ਅੱਛਾ ਜੀ ਆਈ ਬਿਹਰੀਆਂ ਨੇ ਸ਼ੋਭਾ ਬਣਾਤਾ ਤੇ ਸ਼ੋਭਾ ਯਾਤਰਾ ਕਰਦੇ ਨੇ ਤੂੰ ਸੌਰੇ ਨੇ ਇਹ ਦੀ ਬੋਲੀ ਹੈ ਪੰਜਾਬੀਆਂ ਸਾਡੀ ਬੋਲੀ ਨਹੀਂ ਹੈ ਸਰਮੁਖੀ ਬੋਲੀ ਨਹੀਂ ਹੈ ਹਾਂ ਸ਼ੋਭਾ ਸ਼ੋਭਾ ਲੱਗਦਾ ਹਾਂਜੀ ਵਾਹ ਕਰਮੀ ਪ੍ਰਾਪਤ ਹੋਵੇ ਨਾਨਕ ਦਰ ਸੱਚ ਸ਼ੋਭਾ ਪਾਈ ਸੱਚੇ ਜਰ ਤੇ ਜੀ ਦੀ ਸ਼ੋਭਾ ਹੋਵੇ ਪਾਲਵੇ ਤਉਦੋ ਤਰਕੀ ਰਹੀ ਜਾਂ ਫਿਰ ਉਦੋਂ ਤਰ ਨਾ ਮਿਲੇ ਆਦੀ ਪਰ ਇੱਥੇ ਦੇ ਲੋਕ ਕੰਦਦੇ ਆ ਉਹਦੀ ਇੱਥੇ ਦੇ ਲੋਕ ਕੰਦਦੇ ਆ ਉਦੋਂ ਨਹੀਂ ਦੀ ਉਹ ਕਦੇ ਸੱਚੇ ਦਾ ਹੋਵੇ ਸ਼ੋਭਾ ਇੱਥੇ ਦੇ ਲੋਕ ਕੌਣ ਹੋਏ ਫਿਰ ਉਹ ਮੂਰਖਾਂ ਦੇ ਘੋਰ ਚੋਰ ਆਰਾਮ ਘੋਰ ਦੋ ਕੇ ਰੂਪ ਦੀ ਕਾਗਜ਼ਰੀ ਲਈ ਇਹਨਾਂ ਵਾਸਤੇ ਗੁਣਾਨ ਕਰਨ। ਕਨਾਂ ਆਖ ਬੂਰ ਆਂਦ ਕੋ ਦੇ ਵਿਚਾਰੇ ਨੂੰ ਚੋਰ ਹਰਾਮਖੋਰ ਉਹ ਨੇ। ਹਾਂਜੀ ਠੀਕ ਹੈ ਜੀ। ਆਵਨੀ। ਮਨਮੁਖ ਅੰਧ ਅਗਿਆਨੀ ਇਹ ਬੱਜਲ ਲਫ਼ਜ਼ ਬੋਲਦੇ ਨੇ ਬੱਜਲ ਲਫ਼ਜ਼ ਨਹੀਂ ਹੈ ਅੱਛਾ ਬੱਜਲ ਤੋਂ ਇੱਦਾਂ ਨਾਲ ਜੋੜਦੇ ਬਜਰ ਹੈ ਬਜਰ ਉਹ ਕਹਿਣ ਜਰਾ ਤੋ ਰਹਤਾ ਜਿਹੜਾ ਪੁਰਾਣੇ ਦੀ ਹੁੰਦਾ ਰੋਗ ਦੀ ਲਗਦਾ ਜਰਾ ਰੋਗ ਤੋਂ ਰਹਤਾ ਜੋ ਪੁਰਾਣੇ ਦੀ ਹੁੰਦਾ ਬਜਰ ਹੈ ਠੀਕ ਹੈ ਜੀ ਦੋ ਜਿੰਜਾ ਬਜਲ ਨੇ ਸੱਚ ਵੀ ਬਜਰ ਹੈ ਭਰਮ ਵੀ ਬਜਰ ਹੈ ਭਰਮ ਵੀ ਪਰਵਾਹ ਨਹੀਂ ਹੁੰਦਾ ਅਜਿਹੀ ਹੈਗਾ ਵੀ ਜੇ ਆਪੇ ਪ੍ਰਾਣ ਪੁਰਾਣੇ ਹੋ ਗਏ ਭਰਮ ਤੇ ਲੈ ਜਾਊ ਭਰਮ ਦਾ ਇਲਾਜ ਕੀ ਕਰਨਾ ਪੁਰਾਣਾ ਹੋ ਗਿਆ ਆਪੇ ਢਾਡੇ ਪੁਰਾਣੇ ਨਹੀਂ ਖੁੱਦੇ ਆਪੇ ਨਹੀਂ ਖੁੱਲ ਜਾਣੇ ਇਹਨਾਂ ਨੇ ਕਦੇ ਵੀ ਜਿਤੀਆਂ ਵਰਜੀ ਕਰੋੜਾ ਚਾਹੇ ਸਾਲ ਜੂਤੀਏ ਭੁਗਤ ਲੈ ਬਜਰ ਕਪਾਟ ਹਾਂਜੀ ਫਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਬ ਕਾਇਆ ਗੜ ਭੀਤਰ ਕਾਇਆ ਗੜ ਭੀਤਰ ਅੰਦਰ ਨੇ ਇਹ ਹਿਰਦੇ ਵਿੱਚ ਨੇ ਕਿਹਦੇ ਬੁੱਧੀ ਦੇ ਅਰ ਖਸਬ ਦੇ ਵਿਚਾਲੇ ਹਰਦੇ আর ਬੁੱਧੀ ਦੇ ਵਿਚਾਲੇ ਨੇ ਉਧਰ ਹਰਨਾ ਹਾਂਜੀ ਘਟ ਮੈਂ ਹਰਦੀ ਉਸੇ ਠੀਕ ਹਰਦੇ আর ਦੇ ਵਿਚਾਰੇ ਨੇ ਇਹ বজਰ ਕਪਾਟ। ਤੋਂ ਦੇ। ਤੋਂ। ਨੇ ਗੜ ਭੀਤਰ కూੜ কুਸਤ ଅਭਮਾਨੀ। ਹੈ। ਦੀ। ਜਿੱਦਲ ਨੇਰ ਆ ਉਧਰ కూੜ ਹੈ, ਝੂੜ ਹੈ, కూੜਾ ਉਧਰੇ ਹੈ। কুਸਤ ਉਧਰ ਸਹੀ ਸੱਚ ਨਹੀਂ ਹੈ। কুਸਤ ਤਾਂ ਝੂਠ ਨੂੰ ਸੱਚ ਕਰਕੇ ਪੇਸ਼ ਕਰਦਾ। ਲੋਕਾ ਨੂੰ ਲੱਗੇ ਸੱਚ ਹੋਵੇ ਸੱਚ ਹੈ ਉਹ ਕੋਸਤ ਲੋਕਾਂ ਨੂੰ ਸਾਚ ਲੱਗੇ ਇਹਨੇ ਜਿੰਨੇ ਧਰ ਬਣਾਏ ਨੇ ਬੜੇ ਨੇ ਸੱਚ ਕਰਕੇ ਬੰਦੇ ਨੇ ਪਰ ਉਹ ਕੋਸਤ ਦੇ ਬੁਗਾੜਿਆ ਹੋਇਆ ਸੱਚ ਹੈ ਉਹ بگੜਿਆ ਹੋਇਆ ਸੱਚ ਕੋਸਤ ਊੜ ਨੇ ਲੋਕ ਜਿਹੜਾ ਕਰਦੇ ਨੇ ਕਾਰੀ ਨੇ ਕੋਕੇ ਹੁggen ਵਿਰੋਧ ਹੈ ਨਾਮ ਨਾਲ ਵਿਰੋਧ ਕਰਨ ਵਾਲੇ ਲੋਕ ਗੁਰਬਾਣੀ ਤੋਂ ਖਲਾਫ ਪ੍ਰਚਾਰ ਐਸਾ ਕਰਦੇ ਨੇ ਗੁਰਬਾਣੀ ਦੇ ਅਰਥ ਨੂੰ ਵਿਗਾੜ ਕੇ ਉਹ ਐ ਲੱਗਦੇ ਦੇ ਬਈ ਸੱਚੇ ਨੇ ਜਿਵੇਂ ਭਾਈ ਗੁਰਦਾਸ ਦੇ ਨੋ ਤੇ 12 ਲਿਖਾਤੀ ਕੋਈ ਕਹਾਣਿ ਲਗਾਉਂਦੇ ਸਾਖੀਆਂ ਲਗਾਤੀਆਂ ਉਹ ਕੋ ਸੱਤ ਸਭ ਅੱਜ ਉਹ ਦੀਆ ਲਗਾਇਆ ਹੋਇਆ ਹੈ ਜੇ ਅੱਜ ਕੱਲ੍ਹਾਂ ਉਧਰ ਪੜ੍ਹਦੇ ਸੀ ਹੰਕਾਰੀ ਸੀ ਵਿਦਵਾਨ ਸੀ ਵਿਦਵਾਨ ਸਾਰੇ ਹੰਕਾਰੀ ਹੁੰਦੇ ਨੇ ਇਹ ਸਾਰੇ ਮਿਲ ਕੇ ਕਰਦੇ ਹੁੰਦੇ ਨੇ ਇਹ ਕੰਮ ਤੇ ਠੀਕ ਹੈ ਜੀ ਚਾਹ ਕਿਨੇ ਕਿਸੇ ਦੇ ਪੱਲੇ ਕੱਖ ਰਹਿਣ ਦੁੱਦਾ ਹਾਂ ਨਾ ਆਵਨੀ ਮਨਮੁਖ ਗਿਆਨੀ ਪਰਮਪੁਰ ਜਿਵੇਂ ਜਰ ਪਰ ਵਿੱਚ ਭੁੱਲਿਆ ਆ ਮਨਮੁਖ ਨਾ ਗਿਆਨੀ ਏ ਉਰੂ ਕੀ ਫਰਦੂਆ ਸੱਚ ਕੀ ਏ ਉਹਨੂੰ ਨਹੀਂ ਰਾਜਾ ਬਗੈ ਰੂਤਾ ਆ ਉਹਨੂੰ ਦੀ ਬਗਾਲਾ ਅੱਜ ਵੀ ਤੂੰ ਕੀ ਕਰ ਰਹੇ ਉਦਾਂ ਰਵੰਦਾ ਤਾਂ ਠੀਕ ਹੈ ਕਰ ਰਹੇ ਆਂ ਪ੍ਰਚਾਰ ਜੋ ਮੈਂ ਕਰ ਰਿਹਾ ਪ੍ਰਚਾਰ ਬਹੁਤੇ ਸਾਡੇ ਪ੍ਰਚਾਰਕ ਵੀ ਅਣਜਾਣ ਭੜੇ ਜੀ ਸੱਚੀ ਮੰਨ ਕੇ ਪ੍ਰਚਾਰ ਕਰ ਰਹੇ ਨੇ ਹਾਂ ਅੱਧਾ ਗਿਆ ਦੀ ਜਿਆ ਨਹੀਂ ਹਾਂਜੀ ਉਪਾਏ ਕਿਤੇ ਨਾ ਲੱਭਣੀ ਕਰ ਭੇਖ ਠਕੇ ਭੇਖਵਾਨੀ ਮਾਮ ਕਿਸੇ ਉਪਾਏ ਨਾਲ ਨਹੀਂ ਲੱਭਦਾ ਕਿਸੇ ਬੇ ਇਨਾਰਟੀ ਲੱਭਦਾ ਵੇਖ ਬਥੇਰੇ ਕਰ ਕਰ ਥੱਕ ਲਿਆ ਗਿਆ ਦੀ। ਉਹ ਮਾਨੀ ਲੋਕ ਕਰ ਕਰਕੇ ਥੱਕ ਲੇ ਕਿਸੇ ਉਪਾਏ ਦੀ ਲੱਭਿਆ ਕਿਸ ਨੂੰ ਕਰੇ। ਕਿਸੇ ਨਾਲ ਲੱਭੜੀ। ਇਹ ਕਰਨ ਵਾਲੇ ਜਿਹਦੇ ਸੋ ਉਹ ਮਾਨੀ ਦੇ ਕਦੀ ਮਤਾਂ ਦੇ ਦੁਨੀਆ ਦੇ ਵਿੱਚ। ਨੇ ਜੇ ਕੋਈ ਕਾਇ ਸਖਰਨਾ ਕੋਈ ਵੇਖਦੀ। ਖਾਲਸੇ ਦੀ ਵਰਦੀ ਹੈ ਖਾਲਸਾ ਫੌਜ ਤਾਂ ਨਹੀਂ ਗਿਆ ਜਾਣ ਕੇ ਲਈਏ ਦਸਬਾਸ਼ਾ ਦੀ ਖਾਸ ਫੌਜ ਕਾਲਪੁਰ ਕੋਈ ਭੇਖ ਨਾ ਬੰਦੁਰਵੇ ਫੌਜੀ ਵਰਦੀ ਹੁੰਦੀ ਹੈ ਭੇਖ ਨਹੀਂ ਹੁੰਦਾ ਸਾਰੀ ਦੁਨੀਆ ਵਿੱਚ ਫੌਜਾਂ ਨੇ ਕੋਈ ਭੇਖ ਨਹੀਂ ਕੋਈ ਕਹਿੰਦਾ ਵਰਦੀ ਕਹਿੰਦਾ ਵਰਦੀ আর ਭੇਖੇ ਹੀ ਫਰਕ ਆਪਾਂ ਵੀ ਇਸ ਪੰਕਤੀ ਵਿੱਚ ਕਵਰ ਹੋ ਜਾਾਂਗੇ ਸਾਡੇ ਦੇ ਵੀ ਲੱਗ ਜੂ ਦਫਾ ਹੈ ਇਹ ਤਾਂ ਦਬਾ ਸਾਡੇ ਤੇ ਵੀ ਲੱਗੀ ਫਿਰ ਹਰ ਨਾਮ ਜਪਾਨੀ ਗੁਰ ਸ਼ਬਦੀ ਖੋਲਾਈਆਂ ਜਿਹੜੇ ਬਜਰ ਕੋਪਾ ਡਣਾ ਖੁੱਲੇ ਕੇਵੇਂ ਜਾਂਦੇ ਖੁੱਲ ਜਾਂਦੇ ਆ ਜਿਹੜਾ ਗੁਰ ਸ਼ਬਦ ਆ ਨਾ ਗੁਰੂ ਦਾ ਉਪਦੇਸ਼ ਗੁਰਬਾਣੀ ਕਿਉਂਕਿ ਉਹਦੀ ਸਵੰਗਾਂ ਦੀ ਤੇ ਖੁੱਲਦੇ ਚਲੇ ਜਾਂਦੇ ਨੇ ਉਹ ਕੋਰਣਾ ਕਿੱਦਾਂ ਉੱਠਿਆ ਅਸਲ ਦੇ ਵਿੱਚ ਉਹ ਢੇਰਾ ਹੀ ਆ ਵਿਚਾਲੇ ਕਪਾੜ ਕਬੂੜ ਕੁਛ ਨਹੀਂ ਆ ਉਹ ਢੇਰਾ ਢੇਰਾ ਫੇਰਾ ਫਿੱਟਾ ਪੈਂਦਾ ਚਲੇ ਜਨ ਫਿੱਟਾ ਪੈਂਦਾ ਚਲੇ ਜਨ ਫਿੱਟਾ ਪੈਂਦਾ ਚਲੇ ਜਾਂਦਾ ਫਿਰ ਉਹ ਰਹਿਦਾ ਹੀ ਵਿਚਾਲੇ ਢੇਰਾ ਰਹਿਦਾ ਹੀ ਨਹੀਂ ਜਾਂ ਨਾਮ ਉਹਦਾ ਨਾਸੇ ਹੋ ਜਾਂਦਾ ਜਾਂ ਨਾਮ ਪ੍ਰਗਟ ਹੋਣਾ ਬਿਲਕੁਲ ਨਾਸ ਹੋ ਜਾਂਦਾ ਗੁਰਪ੍ਰਸਾਦ ਪਰਮਕਾ ਨਾਸ ਪਰਮਕਾ ਨਾਸ ਹੈ ਕਪਾੜਾ ਤੇ ਉਹ ਪਰਬ ਦੇ ਪਰਦੇ ਸਤਗੁਰ ਖੋਲੇ ਹਰ ਨਾਮ ਦੀ ਪਰਣੀ ਨਾਮ ਜਪਿਆ ਜਾਣਾ ਜਿਉਂ ਜਿਉ ਖੁੱਲ ਜਾਂਦੇ ਨੇ ਜਿਉ ਜਿਉ ਪਰਬਾਂ ਦੀ ਸੁਜੀ ਆਉਂਦੀ ਜਿਉ ਜਪਾਲੀ ਦਾ ਬੰਦਾ ਹੁੰਦਾ ਜਿਉ ਜਿਉ ਪਰਬਾਂ ਦੀ ਸਮਝ ਆਉਂਦੀ ਐ ਗੁਰਬਾਣੀ ਨੂੰ ਪੜਦੇ ਸੁਬੇ ਤੇ ਸੁਬੇ ਤੇ ਗਿਆਨ ਹੁੰਦਾ ਚਾਰਣ ਹੁੰਦਾ ਉਹ ਪਰਬ ਦਾ ਤੇਰਾ ਦੂਰ ਹੋਈ ਜਾਂਦਾ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਣਿ ਤਕੋ ਹਰ ਅਰ ਜਿਓ ਜਲ ਦੋਏ ਇੱਕ ਹੋ ਜਾਂਦੇ ਨੇ ਨਾ ਹਾਂਜੀ ਜੇ ਦੋਏ ਇੱਕ ਹੋ ਕੇ ਚੰਦਦੇ ਨੇ ਇਹ ਕੋਈ ਤਾਂ ਉਗਵਾ ਇਹ ਹੀ ਅਮਰ ਦਾ ਬਿਰਖ ਹੈ ਬਾਹਰ ਆ ਦੇਖ ਲੋ ਕੀ ਲਿਖਿਆ ਗੁਰਬਾਣੀ ਚ ਹਰ ਜਿਓ ਅਮਰ ਦਾ ਹੈ ਇਹ ਜੀਵ ਆਤਮਾ ਹਰ ਜਹ ਦੇ ਹੋ ਜਾਂਦੇ ਨੇ ਨਾ ਇਹ ਕੋਈ ਤਾਂ ਉਗਵਾ ਇਹੀ ਅਮਰ ਦਾ ਬਿਰਖ ਫੇਰ ਰੁਕ ਫੇਰ ਰੁਕਦਾ ਨਾਨਕ ਗੁਰਸਤ ਤੋਂ ਖੁਰਕ ਕਾਰਮ ਫਲ ਫਲ ਗਿਆਨ ਗਿਆਨ ਤੋਂ ਫਲ ਲੰਗਦਾ ਉਹ ਗਿਆਨ ਦੇ ਨਾਲ ਖੁੱਲਦੇ ਨੇ ਕਰ ਦਿੰਦਾ ਇਹ ਅਮਰ ਸਬਰਖਾ ਇਹ ਆਪੇ ਅਮਰ ਸਬਰਖਾ ਕੋਈ ਹੋਰ ਅਮਰ ਸਬਰਖਦੀ ਹੈ ਉਹ ਜਿਹੜਾ ਬਿਰਖ ਕਹਿੰਦੇ ਨੇ ਨਾ ਕਾਮ ਤੈਨੂੰ ਗਊਰ ਕਲਪਵ੍ਰਿਛ ਸਭ ਬਕਵਾਸ ਹੈ ਕਾਂਸ ਤੇ ਜੂ ਕੀ ਹੈ ਬਿਵੇਕਮੁਤੀ ਹੈ ਉਹ ਕਲਪ ਵਿੱਚ ਕੀ ਆ ਬਿਰਛਾ ਕਲਪ ਵਿੱਚ ਜਿਹਨੂੰ ਕਹਦੇ ਨੇ ਬਿਰਛਾ ਹੈ ਦੀ ਪਰ ਇਹਨੂੰ ਬਿਰਛ ਬੰਦੇ ਆਇਆ ਕਿ ਹਾਲਪਰਲ ਕ ਬਿਰਛ ਹੈ ਬਿਰਛ ਕਹਿੰਦਾ ਸੀ ਬਿਰਛ ਹੈ ਦੀ ਹਾਂਜੀ ਤੇ ਤ੍ਰਿਪਤਾਨੀ ਜਿਹਨਾਂ ਨੇ ਪੀ ਲਿਆ ਤ੍ਰਿਪਤ ਹੋ ਗਏ ਉਹਦੀ ਮਾਇਆ ਦੀ ਜਿਹੜੀ ਸੀਗੀ ਅੱਛਾ ਤ੍ਰਿਸ਼ਣ ਖਤਮ ਹੋ ਗਈ